ਲੋਕ ਮਹੱਲਾ ਤੀਜਾ ਜਨਮ ਜਨਮ ਕੀ ਇਸ ਮਨ ਕੋ ਲਾਗੀ ਕਾਲਾ ਹੋਆ ਸਿਆ ਖਨਲੀ ਧੋਤੀ ਉਜਲੀਨਾ ਹੋਵਈ ਜੇ ਸੋ ਧੋਵਣ ਪਾ ਜਨਮ ਜਨਮ ਕੀ ਇਸ ਮਨ ਕੋ ਲਾਗੀ ਕਾਲਾ ਹੋਆ ਸਿਆ ਜਨਮਾਂ ਜਨਮਾਂ ਤੋਂ ਲੈ ਕੇ ਇਸ ਮਨ ਮੈੜਾ ਹੀ ਹੁੰਦਾ ਚਲਾਇਆ ਵੋ ਦੇ ਵਿੱਚ ਚਾਹ ਕੋਈ ਵੀ ਜਨਮ ਸੀ ਇਹ ਬਿਚ ਮੋਰ ਰਹੀ ਹੈ ਇਹ ਵੇਹੜਾ ਉਹ ਨਲ ਕਾਲਾ ਹੋ ਗਿਆ ਲੋਭ ਰਹਿ ਤ੍ਰਿਸ਼ਨਾ ਰਹੀ ਆ ਉਗੜ ਰਹੀ ਰਹੇ ਇਹ ਕਰਕੇ ਮੈਲ ਲੱਗਦੀ ਰਹੀ ਹੈ ਉਜਲਾ ਕਰਨ। ਫਨਰਲੀ ਧੋਤੀ ਜਿਵੇਂ ਉਜਲ ਨਹੀਂ ਹੁੰਦੀ 100 ਧੋਤੇ ਤੇ ਵੀ ਇਸ ਕਰਕੇ ਮਨੁੱਖੀ ਸਰੀਰ ਧੋਤੇ ਤੇ ਉਜਲ ਨਹੀਂ ਹੋਣਾ। ਫਨਲੀ ਤੋਂ ਤੀਉ ਨੂੰ ਕਹਿੰਦੇ ਨੇ ਜਿਹੜਾ ਕੋਲੂ ਹੁੰਦਾ ਨਾ ਬਲਦੇਸੀ ਲੱਕੜ ਦਾ ਕੋਲੂ ਕਪੜਾ ਉਹਦੇ ਨਾਲੋਂ ਤੇਲ ਉਹਦੇ ਚੋ ਲੈ ਕੇ ਨਿਚੋੜ ਕੇ ਫਿਰ ਉਹ ਸੀ ਉਹ ਬਸ ਉਹਦਾ ਪਤਾ ਨਹੀਂ ਸੀ ਲੱਗਦਾ ਰੰਗ ਲਕੀਰਾਂ ਵਾਲੀ ਹੈ ਕੀ ਹੈ ਸਫੇਦ ਹੈ ਅਥਲ ਹੈ ਤਾਂ ਉਹਦੀ ਕੀ ਹੈ ਉਹ ਫਪਰ ਉਹ ਜਲ ਵੀ ਜੀ ਹੁੰਦੀ ਹੋਵੇਗੀ ਚਿੱਟੀ ਨਹੀਂ ਹੋਣੀ ਇਹ ਵੀ ਮੰਨਣਾ ਇਹ ਮੋੜੀ ਮੋੜੀਆਂ ਗੱਲਾਂ ਨਾਲ ਰੋਜ਼ ਪਾਠ ਕਰਦੇ ਚੀਜ਼ਾਂ ਨਾਲ ਦਾਨ ਕਰਦੇ ਤੇ ਐਦਾਂ ਜੀਵਤ ਮਰੇ ਉਲਟੀ ਹੋਵੇ ਮਤ ਨਾਨਕ ਮੈਲ ਨ ਨਾ ਫਿਰ ਜੁਣਨੀ ਪਾ ਜੇ ਜੀਵਤ ਮਰੇ ਜੇ ਜੀਵ ਮਰ ਜਵੇ ਮਰਜ਼ੀ ਛੱਡ ਦੇਵੇ ਨਾ ਇਹ ਆਪਣੀ ਮਰਜ਼ੀ ਸਾਨੂੰ ਮੈਲ ਲਾਈ ਜਾਂਦੀ ਹੈ ਹੋਰ ਰੋਜ਼ ਜੋ ਆਪਣੇ ਪਾੜੇ ਚੱਲਦੇ ਆ ਉਹਦੇ ਨਾਲ ਭਾਵੇਂ ਚੱਲਦੇ ਆ ਤਾਂ ਮਨਦੀਨ ਦਾ ਉੱਤਰ ਹੋਰ ਲੱਗ ਜਾਂਦੀ ਹੈ ਮਨਦੀਨ ਦਾ ਥੋੜੀ ਜਿਹੀ ਲੱਗਦੀ ਜ਼ਿਆਦਾ ਇਹ ਕਰਕੇ ਜੇ ਮਨ ਮਰੇ ਤਾਂ ਅੱਗੇ ਜਾ ਕੇ ਗਲ ਬਣਦੀ ਹੈ ਗੁਰਕੇ ਜਾ ਕੇ ਇੱਕ ਜਿਹੜੀ ਯਾਤਰਾ ਰੱਬ ਦੀ ਹੋ ਜਾਂਦੀ ਹੈ ਉਹ ਉਲਟੀ ਹੋ ਜਾਂਦੀ ਗੁਰਕੇ ਪਾਣੀ ਚ ਆ ਕੇ ਹੀ ਉਹਦਾ ਜਿਹੜਾ ਹੈ ਰੂਪ ਅਰ ਰੰਗ ਉਜਲਾ ਹੁੰਦਾ ਇਹ ਕਿ ਬਦਲਣ ਦੀ ਚਲਾ ਹੋਂ ਮਤ ਬਦਲ ਜਾਂਦੀ ਉਲਟੀ ਹੋਵੇ ਮਤ ਬਦਲਾ ਹਾਂ ਜੀ ਸਾਖ ਤਾਂ ਮਤ ਨੂੰ ਉਲਟੀ ਹੈ ਸਾਖ ਤਾਂ ਨਹੀਂ ਉਲਟੀ ਨਾਮਕ ਮੈ ਨ ਲੱਗ ਗਈ ਨਾ ਫਿਰ ਜੋਨੀ ਪਾਉ ਨਾ ਗੱਲ ਇਹ ਮੈ ਲੱਗਦੀ ਹੈ ਜਦ ਮਤ ਗੁਰਮੁਖਾਲੀ ਮਤ ਹੋ ਜਾਂਦੀ ਹੈ ਗੁਰਮਤ ਅਧਾਰਨੀ ਹੋ ਜਾਂਦਾ ਫਿਰ ਨਾ ਮੈ ਲੱਗਦੀ ਹੈ ਨਾ ਉਹਨੂੰ ਹੈ ਜੁਨੀ ਤਾਂ ਜਦ ਇਹ ਹੈ ਜਾਂ ਮੈ ਲੱਗਦੀ ਹੈ ਮਲੀਨ ਨਾ ਲੱਗੇ ਫਿਰ ਜੋਨੀ ਨਹੀਂ ਕਰਦੀ ਜੁਨੀ ਮਲੀਨ ਲਾਉਣ ਵਾਸਤੇ ਹੁੰਦੀ ਦਾ ਮਤਲਬ ਹੈ ਮਲੀਨ ਲਾਉਣ ਵਾਸਤੇ ਮਲੀਨਤਾ ਕੀ ਹਮਲੀਨਤਾ ਹੁੰਦਾ ਭਰਮ ਬੁੱਧੀ ਚ ਭਰਮ ਦੂਰ ਕਰਨ ਵਾਸਤੇ ਅਸੀਂ ਆਏ ਹਾਂ ਭਰਮੇ ਭੁਲਾ ਦੇ ਦੇ ਸਾਰਾ ਉਹ ਜਿਹੜਾ ਮੈਂ ਕੁਝ ਕਰਤਾ ਆਪਾਂ ਮੰਨਦੇ ਆਂ ਭਰਮ ਹੈ ਕਬਲਕ ਜਾਣੇ ਮੈਂ ਕੁਝ ਕਰਤਾ ਕਬਲਕ ਗਰਭ ਜੋਨ ਮੇਂ ਫਿਰਤਾ ਅਸਲ 'ਚ ਕੋਈ ਸਜਾਸ ਹੋ ਜਾਂ ਨੀ ਦੰਦਾ ਕੋਈ ਉਹ ਕਹਿੰਦੇ ਨੇ ਪਾਈਆ ਜੋ ਤੇਰੇ ਅੰਦਰ ਭਰਮ ਨੂੰ ਦੂਰ ਕਰਿਆ ਤੂੰ ਲੈ ਕੇ ਆ ਗਿਆ ਜাদুਆ ਜਨਮ ਲੈ ਲੈ ਇਹਨੂੰ ਇੱਕ ਪਿਲਾ ਕੇ ਆਈਂ ਆਹੀ ਗੱਲ ਹੈ ਉਹ ਤੇ ਨਹੀਂ ਮਹੱਲ ਜਿਆ ਕਲ ਕਾਲੀ ਕਾਂਢੀ ਇੱਕ ਉੱਤਮ ਪਦਵੀ ਇਸ ਜੁਗ માં ਹੈ ਚਾਰਾਂ ਜੁਗਾਂ ਦੇ ਵਿੱਚ ਕਲਪਨਾ ਜਿਹੜੀ ਹੈ ਨਾ ਕਲਪਨਾ ਆਦਮੀ ਦੀ ਆਪਣੀ ਇੱਛਾ ਬਸ ਕਲ ਕਾਲੀ ਕਲਪਨਾ ਨੂੰ ਕਹਿੰਦੇ ਕਾਲੀ ਹੋਂਦੀ ਜਾਂਦੀ ਹੈ ਬੱਤ ਕਾਲੀ ਹੋਂਦੀ ਜਾਂਦੀ ਹੈ ਬੁੱਧੀ ਕਲਪਨਾ ਨਾਲ ਆਯਾ ਦੀ ਭੁੱਖ ਨਾਲ ਕਾਂਢੀ ਉਹ ਵੀ ਨਿੱਕੀ ਗਈ ਹੈ ਇਹੀ ਲੇਖਾ ਲਿਖਿਆ ਤਾਂ ਗਣ ਗਣ ਜੋਤ ਕੇ ਬਣਾ ਲਈ ਰਾਂ ਪੰਡਤ ਨੇ ਪਰ ਇਹ ਤੂੰ ਜਿਹੜਾ ਲੇਖਾ ਲਿਖ ਲਿਆ ਜਨਮ ਜਨਮ ਦਾ ਨਾ ਪੁੰਨ ਪਾਪ ਦਾ ਇਹ ਕਾਲਾ ਕਰ ਲਿਆ ਸਾਰਾ ਕੁਝ ਇੱਥੇ ਵੀ ਚੌਹ ਜੂਗੀ ਕਿਉਂ ਲਿਖਿਆ ਚੌਹ ਜੂਗੀ ਆਪਾਂ ਚਾਰ ਮੰਨਦੇ ਅੱਪਾ ਘਰ ਮਨ ਦੇ ਆਪਾ ਤਾਂ ਬਹੁਤ ਲੇਖਦੂਰੀ ਮੰਦ ਆਪਾ ਉਹ ਤਾਂ ਉਹ ਜਿਹਨੂੰ ਕਹਿ ਰਹੇ ਨੇ ਉਹਦੀ ਗੱਲ ਕਰ ਰਹੇ ਨੇ ਉਹ ਤਾਂ ਮੰਨਦਾ ਨਾ ਮੈਂ ਪਹਿਲੇ ਜਨਾਦਾ ਦਾ ਇਹ ਜੋ ਕੁਝ ਮੰਨਦਾ ਫਿਰ ਉਹਨੂੰ ਦਮਾਂ ਦੱਸ ਦਾਂਗੇ ਜੁਗੀ ਕਲ ਕਾਲੀ ਕਾਂਢੀ ਇੱਕ ਉੱਤਮ ਪਦਵੀ ਇਸ ਯੁਗ માં ਹੈ ਇਹ ਪਦਵੀ ਇਸ ਯੁਗ ਦੇ ਵਿੱਚ ਉੱਤਮ ਪਦਵੀ ਹੋ ਸਕਦੀ ਹੈ ਤੇਰੀ ਹੁਣ ਲੈਣੀ ਹੈ ਉਹ ਅਵਸਥਾ ਹੋ ਸਕਦੀ ਹੈ ਜਦੋਂ ਨਾਮ ਪ੍ਰਗਟ ਹੁੰਦਾ ਨਾ ਇਹ ਯੁੱਗ ਅਲੱਗ ਹੋ ਜਾਂਦਾ ਥੋੜਾ ਜਿਹਾ ਜਦੋਂ ਸਪਸ਼ਟ ਨਾਮ ਦੀ ਵਿਆਖਿਆ ਕੋਈ ਕਰ ਰਿਹਾ ਹੁੰਦਾ ਹੈ ਇੱਥੇ ਜਿਵੇਂ ਕੋਈ ਪਹਤਾਂ ਦੇ ਵੇਲੇ ਸੀ ਉਦੋਂ ਕਹਿੰਦੇ ਨੇ ਸਤਜੁਗ ਦੀ ਲੜੀ ਲੱਗੀ ਹੋਈ ਹੈ ਪੂਰੇ ਸਤਜੁਗ ਦੇ ਵਿੱਚੇ ਉਦੋਂ ਜੋ ਵਿਚਾਰੇ ਹੋ ਜਾਂਦੇ ਨੇ ਸੰਸਾਰ ਦੇ ਵਿੱਚ ਵੀ ਮਾਇਆ ਦੇ ਵਿੱਚ ਵੀ ਸਤਿਗੁਰੂ ਦੀਵਸਤਾਂ ਵਾਲਾ ਆਦਮੀ ਜਦੋਂ ਇੱਥੇ ਕੋਈ ਹੁੰਦਾ ਹੈ ਨਾ ਪਰ ਜਿਵੇਂ ਪਾਸ਼ਾ ਕਹਿੰਦੇ ਨੇ ਇੱਕ ਕੜੀ ਨਾ ਮਿਲਤੇ ਤਾਂ ਕਲਜੁਗੋ ਹੋਤਾ ਇਹ ਮਿਲਿਆ ਹੋਇਆ ਫਿਰ ਕੀ ਆ ਫਿਰ ਕਲਜੁਗੋ ਹੈ ਨਹੀਂ ਤਾਂ ਸਜੁਗੋ ਉੱਤੇ ਜੋ ਆਪਰ ਤੇ ਦਿੱਤਾ ਤਾਂ ਹੋਈ ਨਹੀਂ ਜਿਹੜਾ ਆਦਮੀ ਹੈਗਾ ਇਹ ਆ ਰਹੂ ਜਾਂ ਸਜੁਗ ਵਿੱਚ ਰਹੂ ਬਸ ਦੋ ਹੀ ਨੇ ਪਰੋ ਉਹ ਬੰਨੇ ਉੱਤੇ ਲਿਖਦੇ ਆ ਵੀ ਚਾਰਾਂ ਜੁਗਾਂ ਚ ਕਲ ਸੀਗੀ ਐ ਨਹੀਂ ਲਿਖਿਆ ਚੌਹ ਜੁਗੀ ਕਲ ਕਾਲੀ ਹੁਣ ਚਾਰਾਂ ਜੁਗਾਂ ਦੇ ਵਿੱਚ ਜੁਗ ਤਾਂ ਹੈਗਾ ਕੋਈ ਸਮਝੋ ਯੋਗਤਾ ਹੈਗਾ ਉਹ ਗੁਰਨਾਨ ਦਾ ਆਇਆ ਸਾਜੂ ਦੀ ਲੜੀ ਲੱਗੀ ਹੋਈ ਹੈ ਪਰ ਉਹਦੇ ਵਾਸਤੇ ਸਾਜੂ ਖੈ ਜੇ ਮੰਨ ਲੂਗਾ ਪਛਾਣ ਲਿਆ ਵੀ ਹੋਏ ਤੇ ਉਹਨਾਂ ਦੇ ਸਾਜੂ ਹੋਰ ਕੀ ਸਾਡੇ ਹੋਰ ਨਹੀਂ ਉੱਤਮ ਪਦਵੀ ਇਸ ਯੁੱਗ ਮਾਹ ਉੱਤਮ ਪਦਵੀ ਜਿਹੜੀ ਇਸ ਯੁੱਗ ਦੇ ਵਿੱਚ ਆਹੀ ਗੱਲ ਹੈ ਵੀ ਸਾਜੂ ਅਵਸਥਾ ਹੋ ਸਕਦੀ ਹੈ ਇਹਦੇ ਵਿੱਚੋਂ कुतम ਪਦਵੀ उच्चतम पदवी उच्चतम पदवी सतयुग ही रास्ता है और उच्चतम पदवी इस युग ਦੇ ਵਿੱਚ ਇਹ ਜੁ ਕਿਹੜਾ ਇਹ ਕਲਯੁਗ ਹੈ ਦੇ ਵਿੱਚ ਪ੍ਰਵੇਸ਼ ਕਰ ਸਕਦੇ ਹੋ દ્વાપર ਪ੍ਰਵੇਸ਼ ਨਹੀਂ ਕੀਤਾ ਜਾ ਸਕਦਾ ਤਾਂ ਦਾ ਮਤਲਬ ਇਹ ਲੈਦਰ ਜਾ ਸਕਦੀ ਹੈ ਜੁਗ ਦੇ ਵਿੱਚ ਆਪਣੀ ਮਰਜ਼ੀ ਛੱਡ ਕੇ ਗੁਰ ਕੇ ਚੱਲ ਕੇ ਹਾਂਜੀ ਗੁਰਮੁਖੀ ਹਰ ਕੀਰਤੀ ਫਲ ਪਾਈ ਉਨੇ ਕੋ ਹਰ ਲਿਖ ਪਾਏ ਗੁਰਮੁਖਾਂ ਹਰ ਹਰ ਕੀਰਤੀ ਕਰਕੇ ਉਹ ਫਲ ਪਾਇਆ ਉਹਨਾਂ ਨੂੰ ਉੱਤਮ ਕੀਤੀ ਕੀਤੀ ਅੰਤਰਾਤਮਾ ਕੀਤੀ ਆਪਣੇ ਨਹੀਂ ਕੀਤੀ ਮੇਰਾ ਦੀ ਵਡਿਆਈ ਕੀਤੀ ਅੰਤਰਾਤਮਾ ਮੇਰਾ ਹੈ ਆਦਮੀ ਦੀ ਵਡਿਆਈ ਨਹੀਂ ਕੀਤੀ ਉਹ ਨਹੀਂ ਜਨਮ ਲੈ ਨੰਦ ਵਾਲਾ ਹਮਾਇਤ ਉਹ ਲਿਖ ਤੁਰੇ ਉਹਦੀ ਕੀਰਤੀ ਕੀਤੀ ਜਿਹੜਾ ਮਾਇਤ ਉਹ भावना दी वस्ताबर लीजे जिन को हर लिख पाहे जिनो हाल लिख के पहला ही नजा आया कि पहला ही मनया होया कि हाल ने कह लिया कि याद कर लो उने भी यही राय दी हां मान ले ये गल तू कि ये ठीक है मानला जिन्ना जर मान अर के तो धोए नहीं मनदे गल नु ਉਹਨਾਂ ਚ ਗੁਰਬਾਣੀ ਵੀ ਨਹੀਂ ਮੰਨੀ ਜਾ ਸਕਦੀ ਜੇ ਮੰਨੇ ਨਾ ਮੰਨੇ ਗੁਰਬਾਣੀ ਦਿੱਤ ਭਾਵੇਂ ਮੰਨਦਾ ਹੋਵੇ ਦਿੱਤ ਕਰਕੇ ਸਿੱਖ ਮੰਨਦੇ ਨੇ ਗੁਰਬਾਣੀ ਨੂੰ ਛੱਡ ਦਿੰਦਾ ਮਨ ਹਾਂਜੀ ਨਾਨਕ ਗੁਰ ਪ੍ਰਸਾਦੀ ਭਗਤੀ ਹਰ ਉੱਚਰੈ ਹਰ ਭਗਤੀ ਮਾਹ ਸਮਾਹ ਗੁਰ ਪ੍ਰਖਾਦੀ ਗਿਆਨ ਦੀ ਕਿਰਪਾ ਨਾਲ ਜਿਹੜੇ ਭਗਤੀ ਦੇ ਭਗਤ ਨੇ ਭਗਤੀ ਕਰਦੇ ਨੇ ਗੁਰਬਾਣੀ ਜਿਹੜੀ ਇਹ ਭਗਤੀ ਹੈ ਗੁਰਬਾਣੀ ਦਾ ਉਚਾਰਨ ਕਰਨਾ ਭਗਤੀ ਦਾ ਉਚਾਰਨ ਪ੍ਰੇਮਾ ਭਗਤੀ ਦਾ ਉਚਾਰਨ ਕਰਨੀ ਇਹ ਉਚਾਰਨ ਕੀਤੀ ਹੋਈ ਹੈ ਉਚਾਰਨ ਕਰਕੇ ਫਿਰ ਉਹ ਵੱਖਰੀ ਰੂਪ ਦੇ ਲਿਖ ਦਿੱਤੀ ਜਿਹੜੇ ਇਹਨਾਂ ਨੇ ਪ੍ਰੇਮਾ ਭਗਤੀ ਕੀਤੀ ਹੈ ਬੋਲੀ ਹੈ ਸਮਝਾਈ ਉਹ ਦਿਨਾਂ ਤੋਂ ਕਰਦੇ ਨੇ ਰਹਿੰਦੇ ਨੇ ਬੋਲਦੇ ਰਹਿੰਦੇ ਨੇ ਸਮਝਾਉਂਦੇ ਰਹਿੰਦੇ ਨੇ ਕਹੇ ਨਾਲ ਉਹਨਾਂ ਕੋਲ ਗਿਆਨ ਆ ਬਵੇਕਾ ਉਹਨਾਂ ਦੇ ਚੇਤੇ ਵਿਵੇਕ ਪ੍ਰਗਟ ਹੈ ਕੋ ਗਬੀਰ ਮੈਂ ਐਸਾ ਗੁਰ ਪਾਇਓ ਜਾਂ ਕੋ ਨੋ ਨੋ ਬੇਕੋ ਉਹਨਾਂ ਕੋਲ ਵਿਵੇਕ ਬੁੱਧੀ ਹੈ ਗਿਆਨ ਉਹਨਾਂ ਦਾ ਵਿਵੇਕ ਹੈ ਪ੍ਰਗਟ ਹੈ ਇਹ ਕਰਕੇ ਉਹ ਭਗਤੀ ਕਰਦੇ ਰਹਿੰਦੇ ਗੁਰਮਤੀ ਜਿਖਿਆ ਕਰਦੇ ਰਹਿੰਦੇ ਹਾਂ ਜੀ ਨਾਨਕ ਗੁਰ ਪ੍ਰਸਾਦਿ ਅੰਦਨ ਭਗਤੀ ਹਰ ਉਚਰੈ ਹਰ ਭਗਤੀ ਮਾਹੇ ਬੜਾ ਸਾਰ ਭਗਤੀ ਦੇ ਵਿੱਚ ਹੀ ਸਮਾ ਜਾਂਦੇ ਨੇ ਗੁਣ ਕਾ ਗੁਣੀ ਸਮਾਵਣ ਗੁਣ ਕੌਂਦੇ ਗੌਂਦੇ ਗੁਣਾ ਦੇ ਵਿੱਚ ਹੀ ਸਮਾ ਜਾਂਦੇ ਨੇ ਜਿਹੜੀ ਭਗਤੀ ਉਚਾਰਨ ਕਰਦੇ ਨੇ ਉਹਦੇ ਵਿੱਚ ਲੀਨ ਹੋ ਜਾਂਦੇ ਨੇ ਇੱਥੇ ਇਹ ਜਿਹੜਾ ਦੂਸਰਾ ਜਿਹੜਾ ਅੱਖਰ ਹੈ ਬਿਹਾਰੀ ਨਾਲ ਹੈ ਭਗਤੀ ਪਰ ਜਿਹੜਾ ਪਹਿਲਾ ਸੀ ਉਸ ਸਿਹਾਰੀ ਨਾਲ ਅਨੰਦ ਭਗਤੀ ਹਰ ਉਚਰ ਹਰ ਭਗਤੀ ਮਾਹੇ ਸਮਾਏ ਮੈਂ ਹਾਂਜੀ ਭੰਕਾਂ ਦੇ ਵਿੱਚ ਭਗਤ ਸਮਾ ਜਾਂਦੇ ਨੇ ਹਰ ਭਗਤੀ ਮਾਹ ਸਮਾਏ ਕੀ ਪਾਬੰਦ ਹੈ ਜੀ ਗੁਣਾ ਦੇ ਜਿਹੜੇ ਗੁਣ ਨੇ ਨਾ ਗੁਣ ਅਸਲ ਦੇ ਵਿੱਚ ਗੁਣ ਕਾਇ ਗੁਣੀ ਸਮਾਵਨਿਆ ਜਿਹੜਾ ਗੁਣਾ ਦਾ ਏਦਾਂ ਗੁਣੇ ਗੁਣ ਨੇ ਸਾਧ ਕਰਦਾ ਕਰਦਾ ਚ ਸਮਾ ਜਾਂਦਾ ਠੀਕ ਹੈ ਜੀ ਹੌੜੀ ਹਰ ਹਰ ਮੇਲ ਸਾਧ ਜਨ ਸੰਗਤੀ ਮੁਖ ਬੋਲੀ ਹਰ ਹਰ bhali baan je sangjan jehde aatma nu apne mool naal mila dende ne apne andar le hal naal ਨੇ dende ne mil jande ne ikkya dekh ke oh nahi ye bhakti jehdi hai har har bhali boli hai bas pehla kise ne ਉਹ ਆਪ ਰਿਤੇ ਹੋ ਗਈ ਤਾਪ ਕੋ ਇੱਕ ਹੋ ਗਈ ਹੈ ਉਪਦੇਸ਼ ਲੈ ਕੇ ਦਾਲ ਤੋਂ ਇੱਕ ਹੋ ਨੇ ਪਾਣੀ ਬੋਲ ਦਿੱਤੇ ਵਿਚਾਰਨ ਕੀਤੀ ਹੈ ਠੀਕ ਹੈ ਜੀ ਹਰ ਗੁਣ ਗਾਵਾਂ ਹਰ ਨਿਤ ਚਵਾਂ ਗੁਰਮਤੀ ਹਰ ਰੰਗ ਸਦਾ ਮਾਣ ਹਰ ਗੁਣ ਗਾਵਾਂ ਮੈਂ ਵੀ ਹਰ ਗੁਣ ਗਾ ਰਿਹਾ ਮਿੱਤਰਵਾਨ ਨਿਤ ਗੁਣਾਂ ਦੇ ਵਿੱਚ ਰਵ ਰਿਹਾ ਬਿਚਲੀਨ ਹੁੰਦਾ ਚਲਾ ਜਾ ਰਹੇ ਉਹਨਾਂ ਨੇ ਬਿੱਤੀ ਸਮਾਉਂਦਾ ਜਾ ਰਹੇ ਹਰ ਨਿਤ ਚਵਾਂ ਹਰ ਨਿਤ ਚਵਾਂ ਨਿਤ ਮੈਨੂੰ ਨਿਤ ਹੀ ਚੌਂ ਰਹਿੰਦਾ ਹੈ ਗਾਉਣ ਦਾ ਹੀ ਚੌਂ ਖਤਮ ਨਹੀਂ ਹੁੰਦਾ ਇਹਦੇ ਬਿੱਤੀ ਹੀ ਹੁੰਦਾ ਚਲਾਇਆ ਜਾਂਦਾ ਗੁਰਮਤੀ ਹਰ ਰੰਗ ਦਾ ਮਾਣ ਗੁਰਮਤਿ ਦੇ ਨਾਲ ਹਰ ਦੇ ਰੰਗ ਮਾਣਦਾ ਰਹਿਣਾ ਮੈਨੂੰ ਹਰ ਦਾ ਰੰਗ ਆ ਜਿਹੜਾ ਉਹ ਹੋਰ ਚੜਦਾ ਦੂਣ ਸਭਾਇਆ ਚੜੀ ਜਾਂਦਾ ਜਾਂਦਾ ਮੈਂ ਰੰਗ ਮਾਣਦਾ ਰਹਿਣਾ ਮੈਨੂੰ ਉਹ ਤੋਂ ਮਿਲਦਾ ਰੰਗ ਤੋਂ ਜਿਹੜਾ ਰੰਗ ਚੜਦਾ ਮੈਨੂੰ ਬੜਾ ਆਨੰਦ ਆਉਦਾ ਹੈ ਮੈਨੂੰ ਤੋਂ ਸੁੱਖ ਮਿਲਦਾ ਰੰਗ ਮਾਣਨ ਦਾ ਮਤਲਬ ਹੈ ਉਹਨਾਂ ਤੋਂ ਸੁੱਖ ਪ੍ਰਾਪਤ ਦੁੱਖ ਪ੍ਰਾਪਤ ਕਰਦਾ। ਤੁਗੜਾ ਨੂੰ ਕਬ ਕਰਦਾ। ਠੀਕ ਹੈ ਜੀ। ਹਰ ਆਂ ਸਭ ਰੋਗ ਗਵਾਤੇ ਦੁੱਖਾਂ ਕਾਣ। ਇਹ ਸਮਝ ਲੋ ਵਿਚਾਰ ਕੀਤੀ ਹੈ ਗੁਰਮਤੀ ਸਮਝ ਆਈ ਜਾਂਦੀ ਹੈ। ਕਿਉਂ ਤਿਉਂ ਆ ਜਿਹੜੇ ਅੰਦਰ ਰੋਗ ਨੇ ਇਹ ਦਵਾਈ ਹੈ ਕਿਸਮ ਦੀ ਪ੍ਰਾਪਤ ਹੋਈ ਜਾਂਦੀ ਹੈ ਮਨੂੰ ਨਾਮ ਦਾ। ਪ੍ਰਾਪਤ ਹੋਈ ਜਾਂਦਾ ਨਾ ਉਹ ਖੁਦ ਪ੍ਰਾਪਤ ਹੋਈ ਜਾਂਦੀ ਹੈ ਮੇਰੇ ਅੰਦਰੋਂ ਬੁਖਾਰ ਨੇ ਜਿਹੜੇ ਔਗਣ ਨੇ ਉਹ ਖਤਮ ਹੋ ਹੀ ਜਾਂਦੇ ਨੇ ਇਹ ਰੋਗ ਨੇ ਔਗਣ ਇਹ ਖਤਮ ਹੋ ਹੀ ਜਾਂਦਾ ਉਹ ਮੇਂ ਦੀਰਗ ਰੋਗ ਹੈ ਉਹ ਮੇਰਾ ਜਿਹੜਾ ਦੀਰਗ ਰੋਗ ਹੈ ਉਹ ਵਿਚਾਰ ਕਰ ਪਾਣੀ ਸਮਝ ਆਉਂਦੀ ਹੈ ਉਹ ਖਤਮ ਹੋ ਜਾਂਦੀ ਹੈ ਦਵਾਈਆਂ ਨੂੰ ਲੱਗੀ ਜਾਂਦੀ ਹੈ ਮੈਨੂੰ ਸ਼ਾਂਤੀ ਮਿਲਦੀ ਚਲੀ ਜਾਂਦੀ ਸਭ ਸਭ ਰੋਗ ਗਵਾਤੇ ਦੁੱਖਾਂ ਕਾਂ ਦੁਖਾਂਏ ਜਿੰਨੇ ਕਾਣ ਕਰ ਦਿੱਤਾ ਸਾਰੇ ਦੁਖਾਂ ਨੂੰ ਨਾਸ਼ ਕਰਤਾ ਦੁਖਾਂ ਨੂੰ ਜਿੰਨੇ ਦੁਖੀ ਰੋਗ ਸੀ ਉਹਨਾਂ ਦਾ ਨਾਸ਼ ਰੱਖ ਦਿੱਤਾ ਜਿਨ੍ਹਾਂ ਨੂੰ ਆਪਣਾ ਆਪਾਂ ਨਹੀਂ ਵਿਸਰਦਾ ਵਿਰਾਕਾਰੀ ਰੂਪ ਨਹੀਂ ਵਿਸਰਦਾ ਉਹ ਸਮਝ ਲੋ ਗੁਰਮੁਖ ਨੇ ਜਿਹੜੇ ਆਪਣੇ ਮੂਲ ਨੂੰ ਨਹੀਂ ਵਿਸਾਰਦੇ ਉਹ ਗੁਰਮੁਖ ਨੇ ਤੇ ਨਿਸ਼ਾਨੀ ਉਹਨਾਂ ਦੀ ਕਦੇ ਵੀ ਨਹੀਂ ਵਿਸਰਦਾ ਉਹਨਾਂ ਨੂੰ ਠੀਕ ਹੈ ਜਿਨ੍ਹਾਂ ਸਾਸ ਗ੍ਰਾਸਨਾ ਵਿਸਰੇ ਤੇ ਹਰ ਜਨ ਪੂਰੇ ਸਹੀ ਵੀ ਪੂਰੇ ਹਰ ਜਨ ਨੇ ਜਿਨ ਸਾਸ ਗ੍ਰਾਸਨਾ ਵਿਸਰੇ ਨੂੰ ਬਿਆ ਪੂਰਨ ਹੋਈ ਜਾਂਦਾ ਪੂਰੇ ਜੋ ਗੁਰਮੁਖੇ ਹਰ ਆਰਾਧ ਦੇ ਤਿੰਨ ਚੁੱਕੀ ਜਮਕੀ ਜਗਤ ਕਾਨ ਪ੍ਰਮਾਤਮਾ ਨੂੰ ਗੁਰੂ ਕੰਨਿਤ ਅਰਥ ਸੇ ਆਰਾਧੇ ਨਰਾਧਨਾ ਕਰਦੇ ਨੇ ਨਾਮ ਦੀ ਉਹ ਕੋਈ ਭੈ ਨਹੀਂ ਜੋ ਗੁਰਮੁਖ ਹਰ ਇੱਥੇ ਦੀ ਗੱਲ ਆ ਗਈ ਜੀ ਜੋ ਗੁਰਮੁਖੀ ਹਰ ਆ ਹੁਣ ਨਾਮ ਬਦਸਤੀ ਗੱਲ ਹੈ ਬਾ ਨਾਮ ਬਦਸਤੀ ਗੱਲ ਹੈ ਆਰਾਧਨਾ ਹੀ ਹੈ ਨਾਮ ਦੀ ਆਰਾਧਨਾ ਹੀ ਹੁੰਦੀ ਹੈ ਹਰ ਦੀ ਆਰਾਧਨਾ ਨਾਮ ਦੀ ਆਰਾਧਨਾ ਕਿਉਂਕਿ ਨਿਰਾਕਾਰੀ ਹੈ ਜਿੱਥੇ ਉੱਥੇ ਅਰਾਧਨਾ ਨਹੀਂ ਹੋ ਸਕਦੀ ਹੈ ਜਿਹੜੇ ਸੇ ਹਰਜਨ ਪੂਰੇ ਸਹੀ ਜਾਣ ਇਹ ਹਰਜਨ ਪੂਰਨ ਬ੍ਰह्म ਹੋ ਗਏ ਪੂਰਨ ਬ੍ਰह्म ਨੇ ਹੁਣ ਉਹਨਾਂ ਦੀ ਅਰਾਧਨਾ ਤਾਂ ਇਹ ਹੈ ਵੀ ਹੁਣ ਸਾਨੂੰ ਪ੍ਰਗਟ ਕਰ ਠੀਕ ਹੈ ਜੀ ਉਹਨਾਂ ਨੂੰ ਦਸ਼ਰੂਪ ਹੋਣਾ ਪ੍ਰਗਟ ਹੋਣਾ ਉਹਨਾਂ ਨੇ ਲਿਖਿਆ ਫਿਰ ਜੋ ਗੁਰਮੁਖ ਅਰਾਧ ਦੇ ਅਰਾਧਨਾ ਦਾ ਸਮਾਗਮ ਆ ਗਿਆ ਜਪਣ ਦਾ ਸਮਾਪਤ ਹੋ ਗਿਆ ਜਪਣ ਦਾ ਤਾਂ ਜਪਣ ਨਾਲ ਤਾਂ ਟਿਕਦੇ ਨਾ ਜਪਣ ਨਾਲ ਤਾਂ ਹਰ ਵਾਰ ਵੀ ਜੁੜੇ ਰਹਿਣੇ ਨੇ ਠੀਕ ਹੈ ਫਿਰ ਹੋ ਗਏ ਦੋ ਪਦਾਰਥ ਪ੍ਰਾਪਤ ਹੋ ਗਏ ਹੁਣ ਅਗਲੇ ਦੋ ਦੀ ਅराधना ਹੋ ਰਹੀ ਹੈ ਦੋ ਜਪਣ ਨਾਲ ਦੋ ਪ੍ਰਾਸਨ ਨੇ ਗਿਆਨ ਪਦਾਰਥ ਔਰ ਮੁਕਤ ਪਦਾਰਥ ਜਪਣ ਨਾਲ ਮਿਲ ਜਾਂਦੇ ਨੇ ਠੀਕ ਹੈ ਤਿੰਨ ਚੂਕੀ ਜਮਕੀ ਜਗਤ ਆਣ ਹਰ ਵੀ ਅराधना ਨਾਲ ਨਵ ਅਗਲਾ ਜਨਮ ਹੋ ਰਹੀ ਨਹੀਂ ਠੀਕ ਹੈ ਇੱਥੇ 22ਵੀਂ ਪੌੜੀ ਸਮਾਪਤੀ ਹੈ ਜੀ ਜੀ